ਜੋ ਆਵੇਂ ਸੇ ਜਾਹੇ ਫਨ ਆਏ ਗਏ ਪਛਤਾਏ ਲਖ 84 ਮੇਦਨੀ ਕਟੇ ਨਾ ਵਧੇ ਉਤਾਏ ਜਰਾ 3 ਲਖ ਮੇਦਨੀ ਚ ਘਟਦਾ ਵਾਧਾ ਕੁਛ ਨਹੀਂ ਜੋ ਆਏ ਸੋ ਜਾਏ ਬੋਲ ਹਾਂਜੀ ਜੇ ਆਏ ਤੇ ਜਾਣਾ ਜ਼ਰੂਰੀ ਆ ਮੁੰਡਾ ਜਾਣਾ ਤਾਂ ਹੈ ਉਹ ਹੈ ਹਾਂ ਯਾਰ ਬਹੁਤ ਜ਼ਰੂਰੀ ਆ ਆਏ ਕੇ ਪੈਸਾ ਆਏ ਤੋਂ ਪਛਾਏ ਤੋਂ ਜਾਂਦੇ ਰਹਿੰਦੇ ਨੇ ਪੈਸਾ ਉਧਰ ਰਹਿੰਦੇ ਨੇ ਲਾਗੜੀ ਦਾ ਉਸੇ ਵੇਦ ਨਹੀਂ ਹੈ ਦੀ ਕੋ ਜਦ ਜਮੀਨਾਂ ਦੇ ਕੋ ਭਰੀ ਜਾਂਦੇ ਨੇ ਕੋ ਭਰੀ ਜਾਂਦੇ ਨੇ ਕੋ ਫਰਕ ਪੈਂਦਾ ਐ ਵੇ ਜਨ ਉੱਭਰੇ ਜਨ ਉੱਭਰੇ ਜਿਨ ਹਰਪਾਇਆ ਜਿਨ ਸੱਚ ਪਾ ਆ ਗਿਆ ਨਾ ਸੱਚ ਮਿਠਾ ਲਾ ਗਿਆ ਹੂੰ ਗਿਆ ਹੂੰ ਉਹ ਮਾਇਆ ਤੋਂ ਉੱਪਰ ਹੋ ਗਏ ਹੂੰ ਗਏ ਮੈਂ ਮਾਇਆ ਵਿੱਚ ਤਾਂ ਸਹੀ ਰਹਿ ਗਿਆ ਦਰਦ ਵਿੱਚ ਹੂੰ ਅੱਧਾ ਗਿਆ ਬਗੂਤੀ ਗਿਆ ਉਹ ਤੇ ਤੁਹਾਨੂੰ ਨੂੰ ਅੱਧਾ ਨਹੀਂ ਬੋਲਦੇ ਹਾਂ ਆਇਆ ਬਲੂਤੀ ਉਹਨਾਂ ਕੋਲੋਂ ਲੈ ਗੋਤੀ ਲਗੀ ਭਾਬੇ ਆਇਆ ਮਾਇਆ ਦਾ ਆਸਰਾ ਇਸ ਨੂੰ ਦੇਉ ਹੂੰ ਹੂੰ ਜਿਹੜੇ ਆਸਰਾ ਬਲੂ ਮਾਇਆ ਉਹਨਾਂ ਦਾ ਆਸਰਾ ਭਾਲਦੀ ਹੈ ਮਾਇਆ ਬੂਤੀ ਤੋਂ ਮਾਇਆ ਦਾ ਆਸਰਾ ਹੀ ਫੰਦੇ ਕਹਿੰਦੇ ਸ਼ਾਇਦ ਤੂੰ ਆਪਣੇ ਘਰ ਨੂੰ ਸਾਧੂ ਕਰੀ ਲੋੜੇ ਦੀ ਮਾਇਆ ਜਿਹੜੇ ਮਾਇਆ ਦਾ ਬਗੋਚਾ ਬੁਧਦੇ ਤੇ ਉਹਨਾਂ ਤੋਂ ਭਾਇਆ ਬਜ਼ੂਤੀ ਹੈ। ਆਹ ਤੇ। ਮਾਇਆ ਕਹਿੰਦੀ ਹੈ ਮੈਨੂੰ ਆਪਣੇ ਚਾਲਾਂ 'ਚ ਰੱਖ ਲਓ ਕਹਿੰਦੇ ਜਾਂ ਤੂੰ ਐਸੀ ਚਿਪੜੇ ਸਾਨੂੰ ਇੱਥੇ ਰੱਖ ਲੈਗੀ। ਤੇਰੇ ਪ੍ਰੇਮ ਵਿੱਚ ਵੀ ਤੇਰੇ ਪ੍ਰੇਮ ਵਿੱਚ ਵੀ ਕੱਪ ਹੈ। ਆਹ ਤੂੰ ਜੇ ਸਾਨੂੰ ਪ੍ਰੇਮ ਕਰਦੀ ਐ ਤਾਂ ਕੱਪੜਾ ਤੇਰੇ ਇੱਥੇ ਰੱਖਣਾ ਚਾਹੁੰਦੀ ਐ ਤੂੰ ਜੇ ਜੱਮਨ ਮਨ ਦੀ ਪਸਾਗਿਆ ਰੱਖਣਾ ਚਾਹੁੰਦੀ ਐ ਇਹ ਠੀਕ ਐ ਉਹ ਜਿਹੜਾ ਆਪਣਾ ਧੰਦਾ ਮੂਆ ਜੇ ਧੰਦਾ ਕਰਾਂਗੇ ਕੋਈ ਵੀ ਚੀਜ਼ ਨੂੰ ਤਾਂ ਫੇਰ ਮੁਕਤੀ ਨਹੀਂ ਆ ਜੀ ਮਰਾਂਗੇ ਹੂੰ ਧੰਦਾ ਪੂਰਾ ਤਨਦਾ ਹੀ ਮਰ ਗਿਆ ਯਾਰ ਦਰੂ ਵਾਇਆ ਦੇ ਹਾਂ ਹਾਂ ਮਾਇਆ ਤਾਂ ਆਪੇ ਵੀ ਗੁਸਤੀ ਹੋ ਗਈ ਮਰ ਹਾਂ ਹੋ ਗਿਆ ਮਾਇਆ ਕੋਲਿੰਗ ਕੋਰਦਲੇ ਜਵਾਰ ਕੱਢਦੀ ठीक है ऑलरेडी ठीक बार खड़ी रहा ऊपर लगे रहते बार लगे रहते चलिए बस आधा दिन बांधो ठीक है बस जो दिस से सो चालसी किसको मीट करे हूं ज्यों संपो ਆਪਣਾ ਤਨ ਮਨ ਅੱਗੇ ਦੇਉ ਜੋਤੀ ਸੇ ਸੋ ਚੱਲਦੀ ਜਿਹੜਾ ਦੇਖਣ ਵਾਲਾ ਹੈ ਉਹਦਾ ਚੱਲਣ ਹਾਰ ਹੈ ਉਹ ਤਾਂ ਆਪਣਾ ਹੱਥ ਰਹਿਣਾ ਤਾਂ ਫਲ ਜਣ ਰਹਿਣਾ ਦੀ ਕਿਉਂਕਿ ਤੇ ਉਸ ਕੋ ਵੀ ਉਹ ਬਿਹਤਰਗੀ ਨੂੰ ਬਣਾਈਏ ਫਿਰ ਜਿਉ ਆਪਣਾ ਤਨ ਮਨ ਅੱਗੇ ਦੇਉ ਮੀਓ ਜੋ ਆਪਣਾ ਕਾਰਬਨ ਆ ਗਿਆ ਤੇ ਉਹ ਜੀਵ ਕਿਹਨੂੰ ਸਪੀਏ ਕਾਰਬਨ ਕਿਹਨੂੰ ਦਈਏ ਹੁਣ ਨਾ ਤਾਂ ਕੋਈ ਦੀਦਾ ਹੀ ਨਹੀਂ ਆਇਆ ਜਿਆ ਠੀਕ ਹੈ ਅਸਤਿਰ ਕਰਤਾ ਸਾਰੇ ਹਾਂਜੀ ਇਹ ਜੀਵ ਤਾਂ ਸਾਰੇ ਕੁਝ ਹੀ ਨੇ ਜਾ ਚੱਲਣ ਹਾਲ ਨੇ ਸਾਰੇ ਜੋ ਕੋ ਜਿਹੜਾ ਜੋਦੀ ਸੇ ਸੋ ਚੱਲਣ ਹਾਰ ਲੱਭੜਿਆ ਹੱਦ ਦਾ ਉਹਦਾ ਹੋਇਆ ਠੀਕ ਹੈ ਅਸਥਿਰ ਕਰਤਾ ਤੂੰ ਧਣੀ ਤਿਸੇ ਕੀ ਮੈਂ ਓਟ ਗੁਣ ਕੀ ਮਾਰੀ ਹੋਮ ਹੋਈ ਚੋਟ ਅਸਰ ਕਰਤਾ ਤੂੰ ਤੜੀ ਮੈਂ ਤੂ ਅਸਰ ਹਾਂਜੀ ਤੇਰੀ ਔੜ ਲਈ ਆ ਬੰਨ ਅਸਰ ਕਰਤਾ ਤੂੰ ਤੜੀ ਕਿਸੇ ਹੀ ਕੀ ਮੈਂ ਓਟ ਕਿਸੇ ਹੀ ਕੀ ਮੈਂ ਓਟ ਉਹਦੀ ਓਟ ਲਈ ਆ ਕਰਤਾ ਤੂੰ ਤੜੀ ਅਸਰ ਹਾਂਜੀ ਗੁਣ ਕੀ ਮਾਰੀ ਹੋਈ ਸ਼ਬਦ ਰਤੀ ਮਨ ਛੋਟ ਗੁਣ ਕੀ ਮਾਰੀ ਹੋਈ ਆਉਦੀ ਵਰਦੀ ਰਾਗ ਦੀ ਮਾਰੀ ਹੋਈ ਉਹ ਵਰਦੀਆਂ ਗੁਣ ਕੀ ਮਾਰੀ ਗੁਣ ਕੀ ਮਾਰੀ ਗੁਣ ਕੀ ਮਾਰੀ ਹੋਈ ਸ਼ਬਦ ਰਤੀ ਦੀ ਛੋਟ ਜੇ ਸ਼ਬਦਾਰਾਂ ਕੀ ਚੜੇ ਤਾਂ ਛੋਟ ਪੈਂਦੀ ਐ ਜਦ ਜੋੜੇ ਦੀ ਬੰਦੀ ਹਾਂ ਹਾਂ ਇੱਕ ਉਪਦੇਸ਼ ਹੈ ਕਿ ਉੱਡਣੀ ਲੱਗਦੀ ਜਿੱਦਾਂ ਜਦੇ ਨੂੰ ਨੌਕਰ ਆ ਜਾਏ ਜਿੱਦਾਂ ਇਹ ਅਸਰ ਹੋ ਜਾ ਹੂੰ ਹੂੰ ਜੇ ਤੂੰ ਮਰਜੀ ਪੱਥਰ ਮਾਰੀ ਜਾ ਉਹਨੂੰ ਗੁਣਲ ਦੇ ਇਹਦੇ ਤੇ ਕੋਈ ਅਸਰ ਨਹੀਂ ਪੈਂਦਾ ਹਾਂ ਮਰਜੀ ਗੁਣਾਂ ਦੇ ਉਹਨੂੰ ਧੀਰੇ ਜਵਾਰਤ ਮੋਤੀ ਮਾਰੀ ਜਾਓ ਇਹਨੂੰ ਪੱਥਰ ਲੱਗਦੇ ਨੇ ਇਹ ਰੂੜੀ ਸੱਟ ਲੱਗਦੀ ਐਦੀ ਪਰਵਾਹ ਨਹੀਂ ਦੀ। ਅੰਨ ਦੇ ਕਾਲੇ ਮਾਰੀ। ਤੋ ਉਹੇ ਪਾਣੀ ਦਾ। ਕਿਸੇ ਦਾ ਬਦੀ ਪੀਂਦਾ। ਠੀਕ ਜਦੋਂ ਅਲਮੁਲੀ ਚੜਦਾ ਕਿਸੇ ਸ਼ਬਦ ਦਾ ਉਹਨਾਂ ਦੇ ਕੋਈ ਮੇਰੇ ਦੁਨੀਆ ਦੇ ਆਦਮੀ ਤੇ ਅਸਰ ਨਹੀਂ ਪਾ ਸਕਦਾ ਇਹ ਕਹਦਾ ਤਾਂ ਹੀ ਅਸਰ ਨਹੀਂ ਪਾ ਰਿਹਾ